ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦਿਆਂ ਸਰ ਸੰਧਿਆ ਗਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨੇ ਸੰਧਿਆ ਤਿਸ ਫਿਰਮਾਰ ਹਰ ਜਨ ਹਰ ਹਰ ਕਾਉਂਦਿਆਂ ਕਿਹੜਾ ਹਰ ਜਨ ਹੁੰਦਾ ਹੈ ਜਦ ਹਰ ਹਰ ਨੂੰ ਹਰ ਕੀ ਕਥਾ ਕਰਦਾ ਹੈ ਹਰ ਚਾਉਂਦਿਆਂ ਹਰ ਹਰ ਉਹ ਕਰਦਾ ਇਹ ਹਰ ਕੀ ਕਥਾ ਕਰਦਾ ਜੀਦਾ ਸਰ ਸੰਧਿਆ ਦਾ ਵਾਰ ਉਹਨੇ ਤੇ ਜਿਹੜਾ ਤੀਰ ਸਾਧਿਆ ਹੋਇਆ ਹੁੰਦਾ ਨਿਸ਼ਾਨਾ ਵਕਾਰਾਂ ਨੂੰ ਬਣਾਇਆ ਹੁੰਦਾ ਗੁਰਬਾਣੀ ਨੇ ਵਕਾਰਾਂ ਨੂੰ ਹਰ ਜਨ ਹਰ ਲੈਵਲ ਉਪਰੇ ਜਿਹੜੇ ਹਰ ਨੇ ਹਰ ਨਾਲ ਲੈਵਲ ਆ ਕੇ ਉਹ ਉੱਪਰ ਆ ਗਏ ਵਕਾਰਾਂ ਤੋਂ ਉੱਪਰ ਆ ਗਏ ਮਾਇਆ ਤੋਂ ਉੱਪਰ ਉੱਠ ਗਏ ਜੇ ਦਸਦਿਆ ਕਿਸ ਫਿਰ ਮਾਰ ਉਹ ਨੂੰ ਹੀ ਮਾਰਨਾ ਜਿਹਦਾ ਦੁਕਾਨਾ ਸਾਡਿਆ ਹੋਇਆ ਬੁਕਾਰਾ ਨੂੰ ਹੀ ਮਾਰਨਾ ਮਾਰੋ ਨਹੀਂ ਮਾਰਨੂ ਮਾਰੂ ਦੀ ਮਾਰਨਾ ਬੁਕਾਰਾ ਨੂੰ ਮਾਰ ਬੁਕਾਰਾ ਦਾ ਰਿਸ਼ਤਾ ਬੁਕਾਰਾ ਨੂੰ ਮਤੋਂ ਅਲਾ ਕਰ ਦੇ अच्छा ਜੀ संधिआ वर्ड है क्या कि सद्या है की होएगा संधिआ ता मतलब तो जुड़ना भी हुंदा दो चीज्या दी संधि सद्या सद्या हुंदा है सिंद्या होया दिसो अच्छा सर सिंद्या गवार एदा की भाव बनेया जी बकारानू गवार गा, जरे है या बकारान फरेया है तेरा स्वभाव ਪਸ਼ੂ ਵਾਲੀ ਬਿੱਟੀ ਹੈ ਜਿਹੜੀ ਕਰਕੇ ਤੇ ਪਸ਼ੂ ਬਿਰਤੀਆਂ ਤੇ ਨਿਸ਼ਾਨਾ ਸੱਦੇ ਨਾਨਕ ਹਰ ਜਨ ਹਰ ਲਿਵ ਉਭਰੇ ਜਿਨੇ ਸੰਦਿਆ ਤਿਸ ਫਿਰਮਾਰ ਲਾਈ ਸੀ ਉਹਨਾਂ ਨੂੰ ਮਾਰ ਦਿੱਤਾ ਹੈ ਜੀ ਉਹਨਾਂ ਨੂੰ ਮਾਰਿਆ ਹਾਂ ਨੂੰ ਬੁਕਾਰਾਂ ਨੂੰ ਮਾਰਨਾ ਔਗੜਾਂ ਨੂੰ ਹੀ ਚੌਥਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਖੰਨ ਜੇਕਰ ਦੂਜਾ ਦੇਖ ਦੇ ਜਨ ਨਾਨਕ ਕੱਢ ਦਚੰ ਹਾਂ ਅੱਖੀਂ ਪ੍ਰੇਮ ਕਸਾਈਆਂ ਅੱਖੀਆਂ ਨੂੰ ਪ੍ਰੇਮ ਦੀ ਖਿੱਚ ਪੈ ਗਈ ਕਸ ਕਸੀਆਂ ਗਈਆਂ ਹਰ ਨਾਮ ਦਾ ਫਿਰ ਵੇਖਦੀ ਆਂਦੇ ਹਰ ਨਾਮ ਨੂੰ ਖੋਜਦੀ ਆਂਦੇ ਅੱਛਾ ਜੀ ਅੱਖਾਂ ਨੂੰ ਜੇ ਪ੍ਰੇਮ ਦੀ ਕਸ ਪੈਈ ਹੋਵੇ ਕਸਾਈਆਂ ਨਹੀਂ ਫਿਰ ਬਣਾ ਕਸਾਈਆਂ ਦਾ ਫਿਰ ਕਸਾਈ ਦਾ ਪਲੂਰਲ ਹੋ ਆ ਨਾਮ ਨਹੀਂ ਭੁਖੇ ਰਹਿੰਦੀ ਆ ਫੇਨਾਂ ਨੂੰ ਹਾਂਜੀ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਜੇਕਰ ਦੂਜਾ ਦੇਖਦਿਆਂ ਨੇ ਅੱਖਾਂ ਨਹੀਂ ਹਟਦੀਆਂ ਜਨ ਨਾਨਕ ਕੱਢ ਦੇ ਚੰਨ ਫਿਰ ਕਹਿੰਦੇ ਸਾਡੇ ਦੇਣੀ ਚਾਹੀਦੀਆਂ ਦੇਖਾਂ ਇਹਦੀ ਰੱਖਣੀ ਚਾਹੀਦੀ ਉਹ ਚਾਹ ਦਾ ਗਲਗਬਾ ਗਲਗ ਦੇ ਢਾਈ ਸੀ ਅਸੀਂ ਅੱਛਾ ਜੀ ਸਾਡੇ ਇਹਦੀਆਂ ਅੱਖਾਂ ਦੀ ਲੋੜ ਨਹੀਂ ਹੱਥ ਇਹ ਫੇਰ ਵੀ ਨਹੀਂ ਹਟਦੀਆਂ ਠੀਕ ਹੈ ਤੁਹਾਨੂੰ ਕਹਿਣਾ ਮੇਰੇ ਅਰਥ ਤੋਂ ਜੋਤਰੀ ਦੇਖੋ ਕੋਈ ਹਾਂ ਜੋਸਫਾਈਂਡ ਹੁੰਦਾ ਹੈ ਉਹਦਾ ਕਪੂਤਾਰ ਅੱਖਾਂ ਬਿਚਿਆ ਗਿਆ ਉਹਦੇ ਦਾ ਸਿਰ ਮਨ ਨੂੰ ਕਿਹਾ ਨਾ ਜੀ ਦੇ ਬਖਾਰ ਹੈ ਉਪਰਤ ਅੱਖਾਂ ਦਾ ਨਹੀਂ ਫੋੜਨੀਆ ਠੀਕ ਹੈ ਜੀ ਅੱਖੀਂ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਦੇ ਚੰਦੋ ਕੀ ਭਾਵ ਹੈ ਜੀ ਤੇਰੀਆਂ ਚਾਹੀਦੀਆਂ ਨੇ ਵੀ ਆ ਤਾਂ ਇਹਨਾਂ ਨੂੰ ਸੁਧਾਰ ਲਓ ਨਹੀਂ ਇਹਨਾਂ ਨੂੰ ਕੱਢ ਦੋ ਹਾਂ ਹਾਂ ਠੀਕ ਹੈ ਜੀ ਫਿਰ ਗੁਰਮਤਿ ਤਾਂ ਬੜੀ ਔਖਾ ਰਸਤਾ ਹੈ ਜੀ ਔਖੀ ਕੀ ਹੈ ਆਖੜੀਕਾਰ ਹਾਂ ਤਾਂ ਹੀ ਉਹ ਕਹਿੰਦੇ ਅੱਖਾਂ ਇਹ ਤਾਂ ਜਹਾਨ ਹੈ ਇਹ ਜਹਾਨ ਤੋਂ ਤੋੜਦੇ ਹਾਂ ਜਹਾਨ ਤੋਂ ਰੂਹ ਵੀ ਤੋੜਨੀ ਹੈ ਦੇ ਟੁੱਟਦੀਆਂ ਤਾਂ ਤੋੜ ਲਓ ਜੀ ਜੀਵੰਦੀ ਠੀਕ ਹੈ ਜੀ ਅਸਲ 'ਚ ਤਾਂ ਬੁੱਧੀ ਬਾਰੇ ਗੱਲ ਜਾ ਰਹੀ ਬੈਠੀ ਹੈ ਜੀ ਹਾਂ ਹਾਂ ਬੁੱਧੀ ਉਹ ਆਖਾ ਹੋਰ ਬੁੱਧੀ ਤੇ ਜਾ ਰਹੀ ਆ ਸਾਰੀ ਗੱਲ ਵੀ ਚੇਤਨ ਜਿਹੜੀ ਬੁੱਧੀ ਭਾਈ ਇੱਥੋਂ ਨਿਕਲ ਜਾ ਨਹੀਂ ਆਪਣੇ ਆਪ ਨੂੰ ਸੁਧਾਰ ਲੈ ਹਾਂ ਕਰਨ ਸੁਣੇ ਨੇ ਨਾਲ ਕਰਨ ਬੁੱਧ ਕਹਿੰਦੇ ਦੁਆ ਜਾਨੂੰ ਫਿਰ ਉਹ ਦੇਤਾ ਗਡੋਆ ਬਣਾ ਦਿੱਤਾ ਕਰਨ ਗਣੋ ਉਹ ਕੰਦਰੀ ਨਹੀਂ ਦਿੱਤੇ ਤੈਨੂੰ ਦੇਨੇ ਫਿਰ ਜੇ ਤੂੰ ਕਰਨਾ ਤੋਂ ਕਬ ਨਹੀਂ ਲੈਂਦਾ ਦਾਦਰ ਛੱਡਦਾ ਜੇ ਆਖਾ ਨਾਲ ਦਰਸ਼ਨੀ ਕਰਦਾ ਜਿਹੜੇ ਕਬੂਦੂ ਦਿੱਤੀਆਂ ਨੇ ਅੱਖਾਂ ਹਰ ਵੇਲਾ ਘਾਲੂ ਨਹੀਂ ਦੇਖਦਾ ਫਿਰ ਗਾਹਾਂ ਨੂੰ ਅੱਖਾਂ ਨਹੀਂ ਮਿਲਣੀਆਂ ਇਹ ਬਿਹਾਲੀਆਂ ਹੋ ਜਾਣਗੀਆਂ ਹਾਂਜੀ ਕਸਾਈਆ ਵੀ ਸ਼ਬਦ ਦੋ ਵਾਰ ਆਉਂਦਾ ਬਿਲਾਵਲ ਮਹੱਲਾ ਚੌਥਾ ਚੌਥੇ ਬਾਦਸ਼ਾਹ ਨੇ ਵਰਤੇ ਆਖੀ ਪ੍ਰੇਮ ਕਸਾਈਆ ਜੋ ਬਿਲਕ ਸਮਾਈ RAM ਗੁਰਪੂਰੇ ਹਰ ਮੇਲਿਆ ਹਰ ਰਸਾ ਕਾਇਦਾ ਦੀ ਜਲ ਥਲ ਮਹੀਲ ਪੂਰਨੋ ਆਪਰੰਪਰ ਸੋਈ ਜੀ ਜੰਤਪ੍ਰਿਤਪਾਲ ਦਾ ਜੋ ਕਰੇ ਸੋ ਹੋਈ ਚੱਲ ਚੱਲ ਅਹੀਂ ਗੱਲ ਫੂਲ ਲਓ ਜਲ-ਥਲ ਦੇ ਵਿੱਚ ਅਹੀਂ ਧਰਤੀ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਜੀਵ ਨੇ ਉਹਨਾਂ ਨੂੰ ਪੂਰਾ ਕਰਨ ਵਾਲਾ ਫੂਲ ਲਓ ਸੋਈ ਉਹ ਆਪਰੰਪਰ ਹੈ ਜਲ ਵਿੱਚ ਦੇ ਜੀਵ ਪੱਥਰਾਂ 'ਚ ਵੀ ਦੇ ਕੀੜੇ ਉਹਨਾਂ ਨੂੰ ਵੀ ਉੱਥੇ ਰੋਜੀ ਹੈ ਪੂਰਾ ਕਰਦਾ ਤੇ ਆਈ ਇਹ ਧਰਤੀ ਹੈ ਜਿੱਥੇ ਉਤਪਾਜ ਕੋਈ ਚੀਜ਼ ਬੀਜਦੇ ਪੌਦੇ ਫੇਰ ਤੇ ਵੀ ਉਹ ਹੈ ਸਿੱਧੀ ਜਗ੍ਹਾ ਨੂੰ ਅਪਰੰਪਤ ਉਹ ਅਪਰੰਪਤ ਹੈ ਹੋਰ ਕੋਈ ਅਪਰੰਪਤ ਨਹੀਂ ਹੋ ਸਕਦਾ ਜੀਵ ਜੰਤ ਪਰ ਪ੍ਰਭਾ ਦਾ ਸਾਰੇ ਜੀਵ ਜੀਵਨ ਦੇ ਪ੍ਰਭਾ ਦਾ ਜੰਤ ਨੂੰ ਵੀ ਪ੍ਰਭਾ ਉਹ ਸਰੀਰ ਦਾ ਵੀ ਰੱਖ ਦਿੰਦਾ ਆਤਮਾ ਦੀ ਖਰਾਕ ਨਹੀਂ ਦਿੰਦਾ ਜੋ ਕਰੇ ਸੋ ਹੋਈ ਉਹ ਜੋ ਕਰਦਾ ਉਹ ਹੁੰਦਾ ਹੋਰ ਵੀ ਕੋਈ ਕਰ ਸਕਦਾ ਉਹ ਬ੍ਰਹਮਾ ਦੇ ਹਿਰਦੇ ਚੰਗੀ ਵਾਲੀ ਕਹਾਣੀ ਹੈ ਜਿਹੜੀ ਉਹ ਭਾਈ ਮਾਨਕੜਾ ਹੱਸਦਾ ਹੈ ਉਹ ਦੀ ਗੱਲ ਹੈ ਜੀ ਇਹ ਹੁਣ ਇਹ ਸ਼ਬਦ ਗੁਰੂ ਦੀ ਗੱਲ ਹੈ ਜੀ ਹੁਕਮ ਦੀ ਹਾਂ ਹੁਕਮ ਦੀ ਗੱਲ ਹੈ ਹਾਂ ਮਾਤ ਪਿਤਾ ਸੁਤ ਭਰਾ ਆਤਮੀਤ ਤਿਸ ਬਿਨ ਨਹੀਂ ਕੋਈ ਕਟਕਟ ਯੰਤਰ ਰਵ ਰਹਾ ਜਪਿਓ ਜਨ ਮਾਤ ਪਿਤਾ ਸੁਤ ਭਰਾ ਭੀਤ ਸਭ ਰਿਸ਼ਤੇ ਆਪਣੀ ਬੋਲ ਨਾਲੇ ਨੇ ਇਸ ਵੀਰ ਨਹੀਂ ਕੋਈ ਉਹਦੇ ਵੀਰ ਕੋਈ ਨਹੀਂ ਇੱਕ ਦੀ ਗੱਲ ਹੈ ਇੱਕ ਜਿਹੜਾ ਹੈਗਾ ਉਹ ਸਾਰਾ ਇੱਕੋ ਹੀ ਆ ਫਿਰ ਸਾਥਾਂ ਦੇ ਵਿੱਚ ਉਹ ਇੱਕ ਦੇ ਦੋ ਬਣਦੇ ਨੇ ਇੱਕ ਪਤਾ ਇੱਕ ਸਕੇ ਆ ਬਾਰਕ ਫਿਰ ਤਾਹੀ ਹੁੰਦਾ ਹਾਂਜੀ ਹਾਂ ਸੱਚਾ ਜਿਹੜਾ ਉਹ ਟੁੱਟ ਕੇ ਜੀ ਝੂਠ ਨਾਲ ਜੁੜਦਾ ਮਾਇਆ ਨਾਲ ਜੁੜਦਾ ਸੱਚ ਸਭ ਨਾਲ ਦਾ ਪਿਤਾ ਸਭ ਸੱਚੇ ਆ ਮਾਲਕ ਵੀ ਖਜ਼ਦ ਵੀ ਸੱਚੇ ਆ ਟਕੜ ਟਸਦ ਅੰਦਰ ਜਾਵ ਰਿਹਾ ਜਪਿਓ ਜਦ ਕੋਈ ਜਿਹੜਾ ਟਕੜ ਦੇ ਅੰਦਰ ਰੰਗ ਰਵ ਰਿਹਾ ਉਹ ਕਿਸੇ ਵਿੱਲੇ ਨਹੀਂ ਜਾਣਿਆ ਹੈ ਜਪਿਆ ਹੈ ਜਿਹੜਾ ਜਪਿਆ ਉਹਨੂੰ ਦੱਸਿਆ ਵੀ ਹੈ ਮਿਆਂ ਨੇ ਉਹਨੂੰ ਜਪਿਆ ਨਹੀਂ ਉਹਨੂੰ ਦੱਸਿਆ ਬਣੀਓ ਦੇ ਬਾਰੇ ਉਹਨੂੰ ਪਤਾ ਵੀ ਲੱਗਿਆ ਨਹੀਂ ਉਹਦੇ ਬਾਰੇ ਕੌਣ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਾਰੇ ਇਹਨੂੰ ਜਪੜਿਆ ਇਹਨੇ ਉਸ ਗੋਪਾਲ ਦੇ ਕੋਣਾ ਜਿਹੜਾ ਸਾਰੇ ਨੋ ਜੋਤਾਂ ਵਿੱਚ ਪ੍ਰਗਟ ਹੈ ਲੋ ਜੋਤ ਹੈ ਤੇ ਸੇ ਚਰਨ ਸਭ ਦੇ ਚਰਨ ਹੋਏ ਚਾਹੀਦਾ ਹੈ ਅੱਛਾ ਗੋਪਾਲ ਫਿਰ ਅਪੂਰਨ ਬ੍ਰਹਮਾ ਜੀ ਆਪਣੇ ਜਿਹੜਾ ਬ੍ਰਹਮਾ ਉਹੀ ਗੋਪਾਲ ਹੈ ਆਪਣੇ ਬਾਸ ਇਹਨੇ ਪੂਰਾ ਆਪੇ ਹੋ ਜਾਣਾ 8 800 ਬੈਠਾ ਉਹੀ ਘਟ ਘਟ ਮੈਂ ਹਰ ਜੂ ਬਸਾ ਫਿਰ ਉੱਥੇ ਠੀਕ ਹੈ ਪਰ ਜੇ ਆਪਾਂ ਕਹੀਏ ਵੀ ਵਾਹਿਗੁਰੂ ਜ ਹੈਗਾ ਤਾਂ ਉਹ ਤਾਂ ਫਿਰ ਪਰਮ ਬ੍ਰਹਮ ਦੀ ਗੱਲ ਹੈ ਜੀ ਨਹੀਂ ਨਹੀਂ ਜੀ ਵਾਇਰੂ ਵਾਲੀ ਗੱਲ ਨਹੀਂ ਉਹ ਜਦੋਂ ਆਉਂਦਾ ਜੀ ਜੰਤ ਸਭ ਪ੍ਰਤਪਾਲ ਦਾ ਚਰਨਾ ਲੋਕਾਂ ਦੀ ਗੱਲ ਹੋ ਰਹੀ ਹੈ ਜੀ ਉਹ ਗੋਪਾਲ ਦੀ ਹੋਈ ਹੈ ਸਾਰੇ ਅੰਦਰ ਜੋਤ ਦਾ ਹੀ ਫਰਕ ਹੈ ਕੋਈ ਕਿੰਨਾ ਜਾਗਦਾ ਕਿੰਨਾ ਸੁੱਤਾ ਪਿਆ ਕੋਈ ਬਹੁਤਾ ਲੰਮਾ ਛੋਟਾ ਫਰਕ ਨਹੀਂ ਹੈ ਜੀ ਅੱਛਾ ਪਰ ਸਗਲ ਜਪੋ ਗੁਣ ਪ੍ਰਗਟ ਸਭ ਲੋਈ ਗੋਪਾਲ ਦੇ ਗੁਣਾ ਨੂੰ ਜਾਣੋ ਹੈ ਅੰਦਰਲਾ ਹੈ ਨਾ ਅੰਦਰਲਾ ਸੱਚਾ ਹੁੰਦਾ ਹੈ ਇੱਕ ਤਾਂ ਸੱਚਾ ਹੈ ਇੱਕ ਉਹ ਤੇ ਬਾਹਰ ਰਿਹਾ ਹੈ ਜੰਮ ਦੇ ਜਾੜ ਦੇ ਵੀ ਬਾਹਰ ਹੈ ਉਹ ਵਰਦਾਜੀ ਹੈ ਉਹ ਮਾਇਆ ਤੋਂ ਲਿਪਟਾ ਹੈ ਇਸ ਕਰਕੇ ਉਹਦੇ ਆਲੇ ਗੁਣਾ ਬ੍ਰਹਮ ਆਲੇ ਗੁਣ ਕੋਈ ਨਹੀਂ ਅੱਧੇ ਦੇ ਗੁਣ ਕੱਢਦੇ ਇਹਨੇ ਕੰਮ ਕਰਕੇ ਆਪਣੇ ਪੂਰੇ ਕਰਕੇ ਗੁਣਾ ਉਹਦੇ ਵਿੱਚ ਇੱਕ ਹੋ ਜਾਣਾ ਹੈ ਹੋ ਜਾਣਾ ਸਾਰੇ ਕੋਲ ਤੇ ਇੱਥੇਰ ਉੱਤੇ ਇਖਤ ਹੈ ਸਾਰਿਆਂ ਨੂੰ ਮੇਲ ਹੈ ਫੇਰ ਮੇਲ ਹੋਣਾ ਸਾਰਿਆਂ ਨੂੰ ਕਦੇ ਮੇਲ ਨਹੀਂ ਹੁੰਦਾ ਸੀ ਕਦੇ ਆਪਣੇ ਚਾਹ ਤਾਂ ਨਹੀਂ ਮੇਲ ਹੁੰਦਾ ਸੀ ਠੀਕ ਹੈ ਜੀ ਤੇ ਇੱਥੇ 13ਵੀਂ ਪੌੜੀ ਸਮਾਪਤੀ ਹੈ ਜੀ ਹੋ ਗਿਆ